ਸਾਥ ਸੰਗਿਓ ਤੇ ਆਸਾਂ ਵਿੱਚ ਇਹ ਗੱਲ ਪੜ੍ਹੀ ਸੀ ਕਿ ਗੁਰੂ ਨਾਨਕ ਜੀ ਦਸੋਂ ਪਾਤਸ਼ਾਹ ਕਿਸੇ ਵੀ ਗੁਰੂ ਦੇ ਟੈ ਜਦੋਂ ਸਤਗੁਰੂ ਦਾ ਸਾਥ ਸੰਗ ਨੂੰ ਵਿਛੋੜਾ ਪਿਆ ਤੇ ਬੜੇ ਵਿਰਾਗ ਵਿੱਚ ਆਪਣੇ ਸਰੀਰਾਂ ਦੀ ਸੁਧ-ਬੁੱਧ ਪੜਾ ਦਿੱਤੀ ਸਤਗੁਰੂ ਆਮ ਸੰਗ ਸੱਚੇ ਪਾਤਸ਼ਾਹ ਜਦੋਂ ਇਸ ਪੈਣੀ ਸਾਹਿਬ ਤੋਂ ਮੌਜੇ ਅਨਸਾਰ ਆਪਣੀ ਮਰਜ਼ੀ ਦੇ ਮਾਲਕ ਜਦੋਂ ਜਾਣ ਲੱਗੇ ਆ ਤਾਂ ਉਸ ਵੇਲੇ ਦੇ ਹਾਲਾਤ ਤੁਸੀਂ ਟੋਟਿਆਂ ਉੱਤੇ ਵੇਖ ਰਹੇ ਹੋ ਕਿ ਮਾਵਾ ਨੂੰ ਪੁੱਤ ਬੜੇ ਪਿਆਰੇ ਹੁੰਦੇ ਨੇ ਤੇ ਕਿਤਨਾ ਪੁੱਤਾਂ ਨੂੰ ਪੋਹਾ ਪੋਹਾ ਪਿੱਛੇ ਸੁੱਟਿਆ ਵਾਲ ਖਿਲਰੇ ਹੋਏ ਆ ਹਰ ਕੋਈ ਬੁੱਢਾ ਬਾਲਾ ਪੁੱਬਾ ਮਾਰਦਣਾ ਜਿਨੀ ਦਾ ਤਿਆਰ ਕਰ ਗੱਡੇ ਸਵਾਰ ਦੇਖ ਦੁਖੀ ਦਿਲ ਹੋਏ ਕਰ ਸੰਤਾਂ ਪੁਕਾਰੀਆਂ ਕਰਨ ਵਰਾਗ ਮਸਤਾਨੇ ਤੇ ਦਵਾਨੇ ਸਾਬ ਹਾਏ ਹਾਏ ਕਰਕੇ ਟਾਂਏ ਬਹੁਤ ਮਾਰ ਤੇ ਵਾਸਤੇ ਪਉਂਦਿਆ ਸਤਗੁਰ ਦੇ ਚਰਨਾਂ ਵਿੱਚ ਤੇ ਗੱਡੇ ਤੇ ਚੜੇ ਹੋਏ ਹੌਸਲਾ ਦੇ ਰਿਆ ਬਾਹ ਖੜੀ ਕਰ ਰਿਹਾ ਤੁਸੀਂ ਵੇਖ ਰਹੇ ਹੋ ਫੋਟੋਆਂ ਉਤੇ ਕਿ ਕਿਤਰਾ ਕੀ ਆਖਿਆ ਉਸ ਵਿੱਚ ਜਿਨੀ ਵਾਰਾ ਪ੍ਰੀਤੋਂ ਪਿਆਰੇ ਸਾਡੇਆਂ ਦਿਲਾਂ ਨੂੰ ਕਿਉਂ ਮੋੜ ਚੱਲ ਵਜਰ ਦੇ ਕਰਕੇ ਆਪ ਤੁਰੇ ਕਿਧਰੇ ਸਾਨੂੰ ਦੁੱਖਾਂ ਦੇ ਵਹਿਣ ਵਿੱਚ ਰੋੜ ਚੱਲੋ ਜਦ ਕਮੜਾ ਨੇ ਆਸ਼ਕਾ ਤੋੜਿਆ ਤੂੰ ਹੌਲ ਮਾਈ ਦੇ ਦਰਸ ਦਾ ਤੋੜ ਚੱਲੋ ਪ੍ਰੇਮ ਪਤੰਗ ਨੂੰ ਅਸੂਤੇ ਵਿਮਜ ਧਾਰਕ ਉਸਾਂ ਨੂੰ ਬੋੜ ਚੜਾਏ ਕਹਿਣ ਦਾ ਭਾਵ ਸਜਣੋ ਵਿਰਾਗ ਦਾ ਸ਼ਾ ਵਿੱਚ ਪੁੱਬਾ ਮਾਰਦੇ ਨੇ ਹੌਸਲਾ ਦਿੱਤਿਆਂ ਵੀ ਹੌਸਲਾ ਨਹੀਂ ਹੁੰਦਾ ਸੋ ਉਸ ਵੇਲੇ ਇਦਾਂ ਇੱਕ ਰੋਂਦਿਆਂ ਨੂੰ ਛੱਡ ਕੇ ਹੀ ਉਹ ਸੱਚੇ ਕਿ ਮੈਂ ਆਵਾਂਗਾ ਤੁਸੀਂ ਹੌਸਲਾ ਤੇ ਕਰੋ ਤੋ ਕਵੀ ਇੱਥੇ ਦੋ ਚਾਰ ਲੈਣਾ ਲਿਖਦਾ ਵੇ ਕਈ ਵਰ੍ਹੇ ਛਮਾਈਆਂ ਗੁਜ਼ਰ ਗਈਆਂ ਅਜੇ ਤੱਕ ਨਾ ਮੋਲਤਾ ਪੁੰਨੀਆਂ ਨੇ ਇਹ ਤੇਰੀ ਦੀਦ ਲਈ ਬੇਚੈਨ ਹੋਏ ਹਾਕੋ ਲੇਸ ਲਵਾ ਅੱਖ ਸਭ ਸੁਣੀ ਆਨੇ ਵੇ ਸਾ ਸਦਾ ਜੁਦਾਈ ਦੇ ਤੀਰ ਤਖੇ ਓ ਰੱਬਾ ਮੇਰ ਹੁ ਚਰੀ ਮ ਸੁਣੀ ਆ ਛਾੜ ਦਿੱਤੇ ਵੇ ਤੇਰੀਆਂ ਚਲਣਾ ਦੇ ਵਿੱਚ ਕਲਿਆਣ ਮੇਰਾ ਐ ਪਰ ਪ੍ਰੀਤਮਾ ਸਾਰਨਾ ਲਈ ਮੇਰੀ ਵੇ ਕੰਨੂ ਤੋੜਦਾ ਪਿਆ ਮਾਣ ਮੇਰਾ ਵੇ ਛੱਟ ਤੂੰ ਜਾਣ ਨਾ ਜਾਣ ਮੈਨੂੰ ਵੇ ਤੇਰੀਆਂ ਚਲਣਾ ਦੇ ਵਿੱਚ ਕਲਿਆਣ ਮੇਰਾ ਸੋਚਾਂ ਤੇ ਰਾਤ ਨੂੰ ਨੀਂਦ ਨਹੀਂ ਲਈ ਵੇ ਥੋੜਾ ਕੀ ਤੇ ਹੋ ਕੀ ਕਾਰ ਗਈ ਆ ਇਥੋਂ ਤੱਕ ਮੈਂ ਕਦੇ ਨਾ ਸੋਚਿਆ ਸੀ ਵੇਖ ਲਈ ਜਿੱਤ ਤੇ ਕਿ ਦੀ ਹਾਰ ਹੋ ਗਈ ਆ ਚੜੀ ਨਗੇ ਪਿਆਰ ਦੀ ਲਾ ਕੇ ਤੇਰੇ ਏ ਲਾਲਾ ਦੇ ਕੇ ਸਾਨੂੰ ਸਰਕਾਰ ਗਈ ਆ ਇਹ ਤੀਰ ਬਰੋਂ ਦੇ ਲਾ ਕੇ ਵਿੱਚ سینੇ ਵੇ ਸਾਨੂੰ ਤੇਰੀ ਜਦਾਈ ਹਾਇ ਮਾਰ ਗਈ ਆ ਆ ਜਾ ਪ੍ਰਤਿਆਲਾ ਬਾਹਰ ਮੁੜ ਕੇ ਰੱਖ ਲਈ ਤੂੰ ਮੰਡ ਮਾ ਤੂੰ ਭਜਣਾ ਪਾ ਕਰਨਾ ਵੇ ਤੂੰ ਇਹ ਤਾਲੇ ਅਸਾਂ ਤਾਲਿਆ ਆ ਇਹ ਛੱਡ ਬਚੇ ਪ੍ਰਵੇਸ਼ ਨੂੰ ਬਾਪ ਟੁੱਟ ਜਾ ਇਹ ਉਹਨਾਂ ਹਾਰ ਕੀ ਹੋਸੀ ਨਮਾਣਿਆ ਦਾ ਇਹ ਹੁੰਦੇ ਠੰਡੀ ਸ਼ਾਮਾਂ ਤੇ ਬੱਚੇ ਓ ਬੜਿਆਈ ਕਥਨ ਸਿਆਣ ਆਲਾ ਨੀ ਤੂੰ ਆਜੋ ਪੜੀਏ ਰੂ ਪੌਂਦੇ ਅਰਜ਼ਾ ਕਰਦੇ ਆ